ਸਾਧ ਸੰਗੀ ਦੁਸ਼ਮਣੋਂ ਸਾਧੂ ਮੇਜ਼ ਸਾਧ ਸੰਗੀ ਦੇ ਹੁਣ ਸਾਦੇ ਦੇਖੋ ਕੋਣ ਸਾਦੇ ਸੁੱਖ ਤਾਂ ਰਹੇਗਾ ਜੇ ਤੁਸੀਂ ਜੁੜਤ ਨਹੀਂ ਹੋ ਸਕਦੇ ਆਪਣਾ ਮਨ ਸਾਦੇ ਦੇ ਤੁਸੀਂ ਪਈ ਤੋਂ ਇੱਥੇ ਨੂੰ ਪਤਾ ਲੱਗ ਰਿਹਾ ਵੀ ਬੇਦਗਿਆ ਕਰਨ ਕਿਵੇਂ ਅਪਲਾਈ ਹੁੰਦੀ ਹੈ ਜੇ ਨੋਦੇ ਕੁਠੇ ਪਾਠੇ ਕਰਕੇ ਦੇਖਦੇ ਆਂ ਤਾਂ ਐਦਾ ਹੋ ਨਹੀਂ ਸਕਦਾ ਉਹ ਮਦਾ ਲਈ ਐ ਐ ਖਿੱਚ ਕੇ ਦੇਖੀਦਾ ਜੂਹ ਪਾਠੇ ਅਰਥ ਉਹ ਨਾਰੰਗ ਸਾਧੂ ਕਹਿ ਕਰਵਾਉਂਦਾ ਸਾਧੂ ਹੈ ਸਾਧੂ ਉਹ ਹੈ ਸਾਧੂ ਦੇ ਸੰਗੀ ਮਹਾਪਨੀਤ ਹਾਂ ਸਾਧੂ ਦੇ ਸਾਧੂ ਕਹਿੰਦਾ ਹੁਣ ਸਾਧੂ ਆ ਗਿਆ ਉਹ ਵੀ ਮਹਾਪ੍ਰੀਤ ਦੀ ਅਵਸਾ ਤੱਕ 도ਹ ਪਹੁੰਚ ਜਾਂਦੇ ਨੇ ਸਵਾਬ ਬਦਲ ਜਾਂਦਾ ਨਾ ਸਾਬ ਸਵਾਬ ਬਦਲ ਜਾਂਦਾ ਉਹ ਇਨਾ ਲਾਭ ਲੈ ਸਕਦੇ ਨੇ ਸਾਧੂ ਤੇ ਹੋ ਨਾਗਿਆ ਦੀ ਸਾਧੂ ਦੀ ਸੁੰਦਟੋਂ ਮਹਾਪ੍ਰੀਤ ਵੰਧਦੇ ਨੇ ਹੋ। ਜੇ ਅਸੀਂ ਅੰਦਰ ਆਪਣਾ ਸਾਫ ਕਰ ਸਕਦੇ ਜੇ ਕਰਨਾ ਹੋਵੇ। ਹਾਂ। ਸਾਧੂ ਕੇ ਸੰਗੀ ਮਹਾਪਨੀਦ। ਸਾਧੂ ਦੂਜੇ ਪਰਸਨ ਆਵੇ। ਸਾਧੂ ਦੂਜੇ ਪਰਸਨ ਆਵੇ। ਹਾਂ ਦੂਜੇ ਪਰਸਨ ਆਵੇ ਸਾਧੂ। ਸੰਗੀ ਤਾਂ ਸਾਧੂ ਸੰਗੀ ਅਰੇ ਤੁਮਨ ਬਲੀਨ ਤਾਂ ਨਹੀਂ ਆ ਸਕਦੇ ਅਗਰ ਤੁਸੀਂ ਸਾਹੂਰ ਕਸੰਗੀ ਮਹਾਪਰੀ ਹੋਣਨ ਨੂੰ ਨਹੀਂ ਕੋ ਗਿਆ ਫਿਰ ਬਲੀਨ ਤਾਂ ਨਹੀਂ ਆਏਗੇ ਹੁਣ ਤੱਕ ਕੋਈ ਤੱਕ ਕੋਈ ਤੱਕ ਕੋਈ ਨਹੀਂ ਆਂਦਾ ਫੇ ਬਲੀਨ ਤਾਂ ਨਹੀਂ ਫੇ ਬਲੀਨ ਨਹੀਂ ਤਾਂ ਹੋਇਆ ਨਾ ਦੇ ਪਿੱਛੇ ਇੱਕ ਦੋ ਚਾਂਸ ਦੇ 400 ਪਰ ਕਿ ਕੋਈ ਚਾਂਸ ਸਾਡੇ ਕੋਲ ਜਿਹਦੇ ਵਿੱਚ ਕੋਈ ਬਗਾਨ ਸਾਧ ਨਹੀਂ ਸੁਖਤ ਹੈ ਦਿੱਤਾ ਪਰ ਜੇ ਜਦ ਬਾਕੀ ਦਾ है, ਕੋਲ ਸੰਤ ਹੈ ਸ਼ਬਦੀ ਸੰਤਾਈ ਜਾਵੇ ਉਹ ਵੀ ਕੋਈ ਅਲੱਗ ਜਿਹੜੀ ਗੱਲ ਉਹਨੇ ਪੂਨਾ ਕਾਢੀ ਹੋ ਲੇ ਕੇ ਕਢੀ ਹੋ ਤਾਂ ਕੋ ਬਣ ਉਸ طرح ਗੁਰਬਾਣੀ ਹੈ ਉਹਦੀ ਵੀ ਬਾਣੀਆਂ ਬਦੂਦੀ ਸੰਗਤ ਹੋ ਰਹੀ ਹੈ ਹਾਂ ਕਿਉਂਕਿ ਉਹਦੇ ਦੀ ਸੰਗਤ ਹੋ ਰਹੀ ਹੈ ਜਿਹਨੇ ਲਿਖੀ ਹੈ ਜਿਹੜਾ ਬੋਲੇ ਹੈ ਜੇ ਜਿਵੇਂ ਦੁਨੀਆਂ ਨੇ ਕੀ ਕੀ ਆਇਆ ਉਹ ਹੀ ਗੱਲ ਹੋ ਰਹੀ ਉਹ ਸਾਧ ਸੰਗੀ ਨਹੀਂ ਪੈ ਸਾਧ ਸੰਗੀ ਦਾ ਗੈਰੂ ਪੈ ਨਹੀਂ ਹੁੰਦਾ ਫਰ ਇਹਦਾ ਮਜ਼ੂਰਾ ਸ੍ਰੀ ਚੰਦੂਗਰ ਵਗੈਰਾ ਬੈਰ ਕਰਦੇ ਸੀ ਬੱਦਰ ਰਹੇ ਗੁਰੂ ਘਰ ਦੇ ਨੇ ਚੁਗਲੀਆਂ ਵਗੈਰਾ ਹੁੱਦੀਆਂ ਸੀ ਜਾਂ ਜਿਹਦਾ ਤੁਸਮੇ ਲੱਤ ਮਾਰੀ ਵੈਰ ਸੀ ਕੀ ਸੀ ਜਿਹ ਆਖਿਰ ਵਿੱਚ ਦਾੜੀ ਪਰ ਸੀ ਇਹ ਖਾਸियत ਦੋਦਰਾ ਰਹੀ ਹੈ ਜੋ ਪਾਸੇ ਤੋਂ ਤਾਂ ਇਹ ਨਵਰਾਨਾ ਦੇ ਬੇਰਕਮਾਉ ਦੇ ਸਾਹੀ ਗੱਲ ਆ ਜੀ ਉੱਥੇ ਹਾਂ ਨਵਰਾਨਾ ਨਾਲ ਦੇ ਬੇਰਕਮਾਉ ਦੇ ਬੇਰਕਮਾਉ ਦੇ ਉਹ ਸ਼ਬਦ ਆਏ ਨੇ ਕਹਿ ਰਹੇ ਨੇ ਸੋ ਬੋਲੇ ਪੇਠੇ ਫਿਰ ਕਿਥੇ ਦੇ ਕਹਿਣਾ ਨਾ ਨਿਦਰਵਾਨ ਗਰਕਮਾਉ ਦੇ ਕੌਣ ਕਮਾਉ ਦੱਸੋ ਕੌਣ ਕੌਣ ਦੱਸੋ कोई देखा वो कोई काबूदा को ताही के और दर बैरा न बारे काबूदे दर बैत गुरु घर है और कोई है उस ये भले ज्यादा जेड़ा सिगा मुसलमानों ते गना प्रचार ज्यादा करता ज्यादा चुगला शुरू हुई है ज्यादा विरोध तक रो हुई है फ्लोर भी थोड़ी ही अपने ਇਹਨਾਂ ਨੇ ਨਾ ਕੀ ਤਾਂ ਫੇਰ ਉਹੀ ਗੱਲਾਂ ਕਰੀ ਜਾਂਦੇ ਯਾਰ ਕੀਤਾ ਹੀ ਉਹਨਾਂ ਨੇ ਯਾਰ ਉਹਨਾਂ ਨੇ ਕੀਤਾ ਉਹ ਕਹਿੰਦੇ ਉਹੀ ਆਪਣੇ ਵੱਲੋਂ ਲੱਗਦੇ ਸਾਡੇ ਕੋਈ ਇਹਨਾਂ ਨੇ ਮੁਸਲਮਾਨਾਂ ਵਾਲੂ ਉਗੜੀ ਕਰ ਕਾਈ ਗਏ ਨਾਲ ਦੇ ਲੈ ਸਿੱਕੇ ਇਹ ਆਪਣੇ ਵੱਲੋਂ ਉਗੜੀ ਕਿਵੇਂ ਕਰਦੇ ਕਾਇਨਾਤ ਕੋਲ ਨੂੰ ਕੁੱਤੇ ਆਪਣੇ ਆਪ ਨੂੰ ਅਸਲੀ ਸਿੱਖ ਮੰਨਦੇ ਨੇ। ਨਗਲੀ ਜੀ ਨੂੰ ਮੰਨਦੇ। ਨਗਲੀ ਉਹ ਬੇਰ ਕਰੂਗਾ। ਕਿਆ ਫਿਰ ਜਿਹੜੇ ਬ੍ਰਾਹਮਣ ਸਾਡੇ ਨਾਲ ਉਥੇ ਛੇਦੀਆਂ ਰਹਿ ਗਏ ਉਹਨਾਂ ਦੀ ਡੋਟੀ ਲੈਂਦੇ। ਸਾਰੇ ਜਿਤਾਉਂਦੇ ਕਿ ਸਤਾਨ ਹੈ ਉਹ ਤਾਂ ਅੰਦਰ ਸਾਈਡ ਤੇ ਪ੍ਰਚਾਰ ਨਹੀਂ ਸਾਡੇ ਕੋਲ ਦਾ ਪ੍ਰਚਾਰ ਤੁਸੀਂ ਕਰ ਰਹੇ ਹੋ ਅਸੀਂ ਤਾਂ ਆਪਣੇ ਨੂੰ ਕਿਹਾ ਵੀ ਗੱਲ ਨਾਲ ਕੋਈ ਫਾਇਦਾ ਨਹੀਂ ਉਹਨਾਂ ਦੇ ਕੋਈ ਜਿਹੜਾ ਕੋਈ ਝੂਠ ਨੂੰ ਉਹਨਾਂ ਦੀ ਵਧੀ ਨਾ ਮਨੂਰਾ ਸੀ ਤੁਸੀਂ ਕੁਰਬਾਨੀ ਦੇ ਅੱਥਾਨੇ ਨਰਸ ਕਰ ਰਹੇ ਹੋ ਤੁਸੀਂ ਗੁਰੂ ਘਰਾਂ ਦੇ ਵਿੱਚ ਕਿਤੇ ਤੂੰ ਜੀ ਕਹਤਾ ਇੱਥੇ ਕਿੰਨੀ ਨੰ ਕਿਸ ਬੰਦ ਕੇ ਕਾਜ਼ਾਦੀ ਕਹਤਾ ਤੁਸੀਂ ਭੋਰਾ ਬਣਾ ਲਾਉਥੇ ਪੌੜੀਆਂ ਦੇ ਉੱਤੇ ਪਾਠ ਕਰ ਲੋ ਇਕ ਕੁਛ ਕਰਤਾ ਇਹ ਜੀਂਗੀ ਤੇ ਜੀ ਉੱਥੇ ਮੂਤੀ ਹੋ ਜੂ ਕਹਤਾ ਇਹਦਾ ਦੁੱਖ ਹੈ ਅਸਲੀ ਪੁੱਦੇ ਤੇ ਨਹੀਂ ਆ ਕੋਈ ਉਹ ਫੂਰ ਸਾਹਿਬ ਤੇਰੀ ਬਣਾ ਤੇ ਬੇਰੀ ਸਾਹਿਬ ਸਾਡੀ ਸਾਹਿਬ ਹਾਂ ਜੈ ਸਾਹਿਬ ਇੱਕ ਕਰੀ ਸਾਹਿਬ ਨਹੀਂ ਨਹੀਂ ਸਵਾਲ ਤਾਂ ਕਿਸੇ ਨੂੰ ਪਤਾ ਬਾਹਰ ਕੱਢਿਆ ਉਹ ਪਤਾ ਵੀ ਜੇ ਤੁਹਾਨੂੰ ਜਵਾਬ ਫੋੜਨਾ ਇਹਨੂੰ ਸਭ ਪਤਾ ਪਤਾ ਸੀਗਾ ਵੀ ਫੋੜ ਤੋਂ ਵੇਖੋ ਜਿਹੜੇ ਫੋੜਿਆ ਹੋਇਆ ਸਾਰਾ ਮੇਰਾ ਸਤਗੁਰ ਪੂਰਾ ਸਾਰੀ ਕਹਾਣੀ ਦਾ ਲਿਖੀ ਭਈਆ ਪਤਾ ਸਮਾਨ ਸਦੀ ਜਿਹੜੇ ਕਹਿੰਦੇ ਹੈ ਨਹੀਂ ਹੁਣ ਪੂਰੀ ਹੋ ਗਈ ਕਿਸੋ ਕੀ ਇਲਾਜ ਆ ਪੰਥ ਵੀ ਚੱਲ ਪਿਆ ਸਹਾਇ ਵੀ ਕਰਤੀ ਦੁਆਰਾ ਸਹਾਇ ਵੀ ਹੋ ਗਈ ਜਨਤੀ ਹੱਸ ਵੀ ਆ ਗਏ ਹੁਣ ਦੱਸੋ ਉਹ ਕਿਹੜੇ ਉਹ ਕੀ ਕਹਨ ਉਹ ਬੋਲਣ ਦਾ ਸਹੀ ਇਹਨਾਂ ਕੰਟਰ ਹੈ ਇਤਹਾਸ ਰੂਬ ਗੁਰਬਣੀ ਅਨੁਸਾਰ ਸਵਾ ਸਾਈ ਜਦੇ ਗੁਰਬਣੀ ਦਾ ਲੈ ਲੋ ਤੁਸੀਂ ਲੈ ਲੋ ਪ੍ਰੋਫੈਸਰ ਜੀ ਤੁਸੀਂ ਜਰੂਰ ਰਹੇ ਉਹ ਨੂੰ ਧੋਖੇ ਕਰਦੇ ਰਹੇ ਦੇ ਉਹ ਜੋ ਗੁਰਬਣੀ ਨੂੰ ਮੰਨ ਲੈਣਗੇ ਉਹਨਾਂ ਦੇ ਜ਼ਿਆਦਾ ਬੰਦੇ ਬਣਨਗੇ ਉਹਨਾਂ ਨੂੰ ਅਤਰਾਜ ਹੈ ਕੋਈ ਨਹੀਂ ਅਤਰਾਜ ਤਾਂ ਥੋੜਾ ਪਾਇਆ ਹੋਇਆ ਜਿਹੜੀ ਇਹਨਾਂ ਨੇ ਈਸਖਾ ਦਾ ਪ੍ਰਚਾਰ ਕੀਤਾ ਅਤਰਾਜ ਤਾਂ ਉਸ ਗੱਲ ਦਾ ਐਸਾ ਕਿ ਜਦੋਂ ਪੀਤ ਰਾਜਾ ਬਈ ਕੇ ਮਿਸ਼ਨਰੀ ਜਨੂ ਦੇ ਖਿਲਾਫ ਵਰਤਾ ਦੇ ਖਿਲਾਫ ਜਾਣ ਕੇ ਉੱਥੇ ਨੂੰ ਪਿੰਚ ਕਰਨ ਮਤ ਉਹਨਾਂ ਦੀ ਗੱਲਾਂ ਨੂੰ ਹਾਈਲਾਈਟ ਦੁਕਾਨਦਾਰ ਸ਼ਹਿਰਾਂ 'ਚ ਰਹਿਣ ਵਾਲੇ ਦੂਏ ਨੇ ਦੂ ਦੁਕਾਨਦਾਰ ਮਾਂ ਤੋੜ ਕੇ ਤੁਹਾਨੂੰ ਆਪਣੇ ਘਾਹ ਕਬਲੋੜੇ ਉਹ ਰਣਾ ਕਰਨਾ ਕੋਸ਼ਿਸ਼ ਇਹ ਆ ਥੋੜਾ ਚੜਾਵਾ ਆਪ ਰੱਖ ਲਓ ਫਿਰ ਪੜਨ ਦਾ ਨਾ ਨੇੜੇ ਆ ਜੀ ਬਗਦੇ ਬੇਦ ਨਾ ਤੇ ਬੇਦ ਆ ਜਾ ਮੈਂ ਬੇਦ ਕੇ ਹੈ ਇਹਨਾਂ ਨੂੰ ਅੱਗ ਦਾ ਗੁੱਠੀ ਆਹੋ ਬੁੱਢਾ ਸੋਹਣਾ ਕਹਿੰਦਾ ਤੇ ਸਾਥ ਤੱਕ ਚੁੱਪ ਕਰ ਕੀ ਮਤਲਬ ਸੀ ਇਹ ਦਾ ਇਹੀ ਬੰਦ ਤੇ ਸਭ ਦੇ ਗੁੰਡਾ ਇਹ ਸਰਾਰੀ ਗੁੰਡਾ ਉਹ ਨਵਾਂ ਰੂਪ ਪਾਉਣ ਦਾ ਰਿਹਾ ਦਾ ਥੋੜਾ ਜਿਹਾ ਉਹ ਚੜਾਵਾ ਇਟ ਰੂਪਾਈ ਹੁੰਦਾ ਗੁਰਦੁਆਰੇ ਦੇ ਆਦਮੀ ਸਭੇ ਹਾਂ ਅੰਦਰ ਦੀ ਬਾੜ ਵੀ ਜਿਹੜੇ ਬੰਦੇ ਨੇ ਉਹ ਰਖੀਏ ਆਪਣੇ ਗਰੰਟੀ ਆਪਣੇ ਪੈਦਾ ਕਰ ਲੀਏ ਪ੍ਰਚਾਰ ਦੇ ਜੇ ਗਰਮ ਜਨ ਇਹ ਜਰਗੇ ਸੰਗਤ ਨੂੰ ਕਥਾ ਕਰਕੇ ਗੋਲਕ ਦੇ ਕਬਜਾ ਕਰ ਲੀਏ ਤਾਂ ਆਪ ਸੀ ਐਂ ਗੱਲ ਲੱਗ ਆਪਾਂ ਚੋਇਆ ਨਾ ਸਵਾ ਗੱਲ ਦੀ ਨੀ ਨਲੀ ਨਹੀਂ ਬੈਰ ਸਾਥ ਸੰਗੀ ਕਿਸ ਆਦੇ ਤੋਂ ਕਿਹੜਾ ਸਾਥ ਸੰਗੀ ਕਿਸੇ ਬੈਰ ਜਿਹਦਾ ਸੰਗੀ ਸਭਨ ਸਧਿਆ ਉਹਦਾ ਕਿਸੇ ਨਾਲ ਕੋਈ ਬੈਰ ਨਹੀਂ ਸਭ ਕੋ ਵੀ ਤਾਂ ਆਪਣੀ ਕਿੰਨੂ ਹਰ ਸਭੂ ਕੇ ਸਾਜਨ ਇਹ ਗੱਲ ਤਾਂ ਸੁਣ ਪ੍ਰਚਾਰ ਕੀਤਾ ਉਹਨੂੰ ਆਦੇ ਰਹਿਣਾ ਤੋਂ ਬਾਹਰ ਜਿਸੂ ਜੀ ਦਾ ਬੈਰ ਜੀ ਦਾ ਬੈਰ ਹੈ ਉਹ ਸਿੱਖੇ ਦੀ ਇਹ ਬੀਵੀ ਦੇ ਇਹਨਾਂ ਕੋ ਵੀ ਦੇ ਬੈਰ ਤਾਂ ਨਹੀਂ ਬਰਾਇਟੀ ਹੈ ਰੋਜ਼ ਸਹੀ ਅਜਨੇ ਨੇ ਸਭ ਬੈਰ ਵੀ ਵਾਲੇ ਇਹਦਾ ਦਾ ਬੈਰ ਰੋਜ਼ ਵਾਲੀ ਚੀਜ਼ ਹੈ ਜਿਹੜੇ ਇਤਹਾਸ ਤੋਂ ਗੁਰਮਤਿ ਬਚੀ ਆ ਗੁਰੂ ਘਰ ਬਚਿਆ ਵੈਰ ਵਿਰੋਧ ਦਾ ਬੀਜ ਹੈ ਉਹ ਚੋਰ ਕੁਛ ਨਹੀਂ ਆ ਇਤਹਾਸ ਹੈ ਪਰ ਵੈਰ ਦੀ ਅਸੀਂ ਨਹੀਂ ਵੈਰ ਖਮੂਦੇ ਉਹ ਖਮੂਦੇ ਜੀ ਉਹ ਕਹਿ ਰਹੇ ਨੇ ਸਾਧ ਸੰਗਤ ਜੀ ਸੁਣ ਰਹੇ ਤਦ ਸੰਬਾਸ਼ਣ ਕੀਆ ਜੋ ਪ੍ਰਵਕਾਹਾ ਸੋਈ ਹਾਂ ਕਹਵੂ ਔਰ ਕਿਸੇ ਤੇ ਦਾਅਵਾ ਨਹੀਂ ਹੈ ਆਹੀ ਗੱਲ ਕਹੀ ਔਥੇ ਆਈ ਤੇ ਵੈਰ ਦੀ ਗੱਲ ਆਈ ਐ ਔਥੇ ਵੈਰ ਦੀ ਅੰਡਛਾਤੀ ਵੀ ਮੈਂ ਤਲਵਾਰ ਜ਼ਰੂਰ ਆ ਘੋੜੇ ਜ਼ਰੂਰ ਨੇ ਪਰ ਹੋਰ ਤਰ੍ਹਾਂ ਦਾ ਵੀ ਥੋੜਾ ਲੱਗੂਗੀ ਬਾਣੀ ਬੋਲੀ ਹੋਰ ਤਰ੍ਹਾਂ ਦੀ ਐ ਪਰ ਗੱਲ ਇਹਦੇ ਨਾਲੇ ਬੰਨ੍ਹਾ ਔਰ ਕਿਸੇ ਸੇ ਨਾ ਗਾਇਆ ਹੂੰ ਉਹ ਆ ਵੀ ਫਲਸਫੇ ਦੀ ਗੱਲ ਕੀਤੀ ਐ ਔਥੇ ਇੱਥੇ ਵੀ ਫਲਸਫੇ ਦੀ ਗੱਲ ਐ ਬੇਰ ਭਾਵਨਾ ਨਾਲ ਕੋਈ ਗੱਲ ਨਹੀਂ ਕਹਿ ਰਹੇ ਜੋ ਜੋ ਸੱਚਾ ਉਹ ਕਹਿ ਰਹੇ ਜੋ ਸਰਗਾ ਪ੍ਰਵਾਨ ਅਗਲੋ ਕਹਿ ਰਹੇ ਜੋ ਸਾਤੇ ਕਹਾਈਓ ਕਹਿ ਰਹੇ ਐ ਤੇ ਵੀ ਬਾਰੇ ਉਹਨਾਂ ਨੇ ਵੀ ਬਾਰੇ ਕਿ ਦੁਹਾਨ ਵਿੱਚ ਇੱਕ ਇਕਸਾਰਤਾ ਦਸਨ ਕਿਵੇਂ ਇਹ ਉਹਦੇ ਨਾਲ ਕਿਵੇਂ ਟੁੱਟਦੀ ਹੈ ਵਿਚਾਰਤਾਰਾ ਇੱਕ ਹੈ ਦੋ ਵਿਚਾਰਤਾਰਾ ਦਸਨ ਕਿਵੇਂ ਬਦਲੀ ਹੈ ਉਹਦੇ ਵਿੱਚ ਵਿਚਾਰਤਾ ਸਭਲਾ ਤਾਂ ਰੂਪ ਵਿਚਾਰਤਾ ਦਾ ਵੀ ਪਤਾ ਨਹੀਂ ਵੀ ਵਿਚਾਰਤਾ ਰਹੂਦੀ ਕੀ ਹੈ ਗੌਰ ਮਤ ਜੋ ਇਹਦੀ ਵਿਚਾਰਤਾ ਰਹਿੰਦੀ ਹੈ ਉਹਦੀ ਵਿਚਾਰਤਾ ਦਾ ਫਰਕ ਦੱਸਣ ਕਿੱਥੇ ਹੈ ਭਾਸ਼ਾ ਦੀ ਵੀ ਗੱਲ ਉਹ ਭਾਸ਼ਾ ਹੋਰ ਹੈ ਉਹ ਦੋ ਤਲਵਾਰਾਂ ਵਾਲੀ ਦੀ ਭਾਸ਼ਾ ਇੱਕ ਤਲਵਾਰ ਵਾਲੀ ਦੀ ਭਾਸ਼ਾ ਇਹ ਭਗਤਾਂ ਦੀ ਭਾਸ਼ਾ ਇਹਦੇ ਸਾਰੇ ਭਗਤ ਨੇ ਉਹ ਤੇ ਗੱਲ ਬਗਦੀ ਨਹੀਂ ਉਹ ਤੇ ਖਾਲਸੇ ਦੀ ਗੱਲ ਹੈ ਉਹ ਤੇ ਗੱਲ ਨਹੀਂ ਭਗਤ ਐਸੇ ਗੱਲ ਬਣ ਜਾਂਦਾ ਇੱਥੇ ਖਾਲਸਾ ਇੱਕ ਤਲਵਾਰ ਵਾਲਾ ਖਾਲਸਾ ਇਹ ਵੀ ਹੈ ਖਾਲਸਾ ਭਗਤ ਵੀ ਹੈ ਇੱਕ ਤਲਵਾਰ ਵਾਲਾ ਉਹ ਦੋ ਤਲਵਾਰਾਂ ਵਾਲਾ ਇਹ ਖਾਲਸਾ ਕੱਲਾ ਦੇਵਤਾ ਨਾਲ ਰੱਖੀ ਵੀ ਹੈ ਉਹ ਖਾਸਾ ਰਾਮ ਸਿੰਘ ਵੀ ਹੈ ਨਾ ਉਹ ਇਹ ਖਾਸਾ ਕੱਲਾ ਹੀ ਦੇਵਤਾ ਹੈ ਭਗਤ ਕੱਲਾ ਹੀ ਦੇਵਤਾ ਇਹ ਸੁਣੇ ਚ ਰਾਮ ਸਿੰਘ ਸਾਡੀ ਗੱਲ ਨਹੀਂ ਆਈ ਉਥੇ ਰਾਮ ਸਿੰਘਾਂ ਦੀ ਦੋਲ ਦੀ ਗੱਲ ਆਈ ਹੋਈ ਹੈ ਉਹ ਇਹ ਰਾਖਸਿਆਂ ਨੂੰ ਮਤ ਦੇਣ ਵਾਲਾ ਉਹ ਰਾਮ ਦਾ ਵੀ ਗੁਰੂ ਹੈ ਇਹ ਕੱਲਾ ਪਖਤਾਨਾ ਗੁਰੂ ਹੈ ਇਹਨਾਂ ਨੇ ਹੱਥ ਖੜੇ ਕਰਤੇ ਕੀ ਕਹਿੰਦੇ ਨੇ ਸਾਖਤ ਕੀ ਦਾ ਰੂਣਾ ਹੈ ਨਿੰਦਕਾ ਦਾ ਰੂਣਾ ਆ ਨਿੰਦਕਾ ਦਾ ਰੂਣਾ ਉਹ ਕਹਿੰਦੇ ਨਿੰਦਕਾ ਦਾ ਰੂਣ ਤਲਵਾੜਾ ਦੁਈ ਹੈ ਆ ਨਹੀਂ ਹੈ ਐਦਾਂ ਹੈ ਜੀਵਨ ਚ ਸਿਰ ਦਾ ਸਵਾਚ دارو دے تے او دی مرضی تے اساں دارو تاں اے تے اوہ اوے من لے جے دوبارہ او آ جے اندھر گالے ساتھ سارے نند کیتے رہے او تاں فیشن والا اوے تا سارے ددگ دے تری ਕਾ ਜਿਹਦੇ ਛੜੇ ਜੇ ਉਹ ਕਹਿੰਦੇ ਭਾਈ ਇਹਨਾਂ ਦੀ ਕੋਈ ਦੋਈ ਨਹੀਂ ਜੇ ਬੰਦੇ ਦਾ ਦਾਲੂ ਇਹ ਇਹਦਾ ਮਗਰ ਬਣਿਆ ਨਹੀਂ ਕਿਹਦੇ ਜੇ ਉਸ ਟਾਈਮ ਹੈ ਨਹੀਂ ਕਰਦਾ ਹੈ ਛੱਡ ਦੂਗਾ ਫਿਰ ਉਹ ਡੁੱਟ ਕੇ ਰਹਿ ਜਾਏਗੀ ਦਾਰੂ ਹੋਣੀ ਬਾਤ ਤੇ ਇਦਰੇ ਬਾਅਦ ਏ ਇਹਨੂੰ ਵੀ ਛੱਡੂਗਾ ਤੇ ਛੱਡ ਦਿੱਤੀ ਤੁਸੀਂ ਕਿੱਥੇ ਰਹਿ ਗਿਆ ਵੀਰੋ ਦਿੱਤਕੀ ਦਾਰੂ ਨਾ ਹੈ ਬਹੁਤ ਟੈਕਨੀਕਲ ਗੱਲਾ ਹੈ ਵਕੀਲਾਣੀ ਜਿਹਨਾਂ ਨੇ ਦਿੱਤਕਾ ਦਵਾ ਹੈ ਉਹ ਤੇ ਇਹ ਹਨਾਰ ਆ ਗਿਆ ਨਾ ਨਾਲ ਦੇ ਕੰਡੀਸ਼ਨ ਕਦਰ ਉਹ ਨਹੀਂ ਆ ਪਰ ਉਹਦੇ ਨਾਲ ਸ਼ਰਤ ਹੈ। ਬਦਲੇ ਆਪਣੇ ਆਪ ਨੂੰ ਬਦਲਾ ਲਿਆਵੇ। ਉਹ ਜਿੰਨਾ ਜਰ ਬੋਧ ਕਰਦਾ ਸੱਚ ਦਾ ਧਰ ਕੇ ਮਿਲ ਜਾਊਗਾ। ਕਰਨ ਦੀ ਉਹ ਤਾਰ ਰਿਹਾ ਆਪ ਲੋਕਾਂ ਨੂੰ। ਤਾਂ ਦਾ ਤਾਂ ਸੱਚ ਉਹ ਤਾਂ ਵਾਹ ਵੜ ਕੇ ਲੈ ਜਾਊਗਾ ਤੁਸੀਂ ਕਹਿੰਦੇ ਹੋ ਤਾਂ ਤਾਂ ਸੱਚ ਛੇਲੇ ਦੇ ਸਾਰੇ ਉਹਦੇ ਮਾਗਾਂ ਦੇ ਛੇਲੇ ਘਟੇ ਕੀਤੇ ਨੇ ਮੇਰੀ ਸਾਧ ਸੰਗੀਤ ਇਸ ਸੇਵ ਨਹੀਂ ਗਾਇਰ ਸਾਧ ਸੰਗ ਵਿੱਚ ਇਸ ਜਿਹੜਾ ਸਾਧ ਦੇ ਨਾਲ ਸੁਤ ਸੁਤੀ ਹੈ ਨਾ ਜਿੰਨੇ ਵੀ ਖਾਲਸਾ ਸਾਹਿਬ ਜੀ ਦੇ ਲੋ ਇਹ ਗੁਰਮੁਖੀ ਦੀ ਸੰਤੋਖੀ ਇਹ ਗੁਰੂ ਕਾ ਜੀ ਜੀ ਸੰਤਾ ਤਾਂ ਫੇਰ ਕਿ ਸਹਾਂ ਵੀ ਵੈਰ ਨਹੀਂ ਹੁੰਦਾ ਕੱਲੇ ਸਾਥ ਦਾ ਇਹਦੀ ਸਾਰੀ ਸੰਗਤ ਦਾ ਸਾਥ ਦੀ ਜਿਹੜੀ ਸੰਗਤ ਆ ਉਹਦਾ ਵੀ ਕਿਸੇ ਨਾਲ ਵੈਰ ਨਹੀਂ ਸੰਗਤ ਸਾਥ ਦੀ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਜੇ ਵੈਰ ਆ ਨਹੀਂ ਹੈ ਬਿਲਕੁਲ ਪਰ ਉਹ ਸੰਭਤੀ ਨਹੀਂ ਬਣਿਓ ਅਸੀਂ ਕਹਿੰਦਾ ਵੀ ਮੈਂ ਤਾਂ ਹੀ ਕਿਹਾ ਸੀ ਨਾ ਵੀ ਜੇ ਕੋਈ ਹੋਰ ਹੋਰ ਜੇ ਤਾਂ ਕਰਦਾ ਕੁਰਬਾਨੀ ਦੀ ਗੱਲ ਫੇਰ ਤਾਂ ਠੀਕ ਆ ਸਾਡਾ ਸਟੂਡੈਂਟ ਕਹੇ ਚਾਹੇ ਉਹਨਾਂ ਦਾ ਬੰਦਾ ਕਹੇ ਚਾਹੇ ਗੁਰੂਪ ਕਹੇ ਜੋ ਮਰਜ਼ੀ ਕਹਿ ਸਕਦਾ ਚੌੜਾ ਕਹੇ ਜੇ ਸਾਡਾ ਜੇ ਕੋਈ ਹੋਰ ਗੱਲ ਕਰਦਾ ਫਿਰ ਉਹ ਇਕੱਲਾ ਅਸੀਂ ਤਾਂ ਇੱਥੇ ਤੱਕ ਕਰਨਾਲ ਆਉਂਦੇ ਹਾਂ ਜੇਦਾ ਗੱਲ ਕਰਦਾ ਜੇ ਕੋਈ ਹੋਰ ਕਰਦਾ ਰੋਜ਼ਾਨਾ ਇਸ ਸੋਨਿਵਾਰ ਸਾਧਕੇ ਸੰਗੀ ਨਾ ਵੀਂਗਾ ਪੈ ਇਸ ਕਰਕੇ ਸਾਧ ਦੇ ਜਿੰਨਾ ਜਾਵਾਂਗੇ ਸਿੱਧੇ ਜਾਵਾਂਗੇ ਸਟੇਟ ਲਾਈਨ ਤੇ ਬਿਲਦਾ ਪੈ ਲੀ ਜਾਂਦਾ ਟੈਟਾ ਨਹੀਂ ਆਖੁੰਦਾ ਡੇਢ ਪੱਖ ਦੀ ਡੇਢ ਪੱਖ ਦੀ ਡੇਟਾ ਜਾਊਂਗੇ ਲੈਣ ਕੱਟੀ ਜਾਊਗੀ ਸਾਧਕੇ ਸੰਗੀ ਨਹੀਂ ਕੋ ਮੰਦਾ ਸਾਧ ਸੰਗ ਜੇ ਨਾ ਚਰ ਸਾਹਿਬ ਦੀ ਸੁਰਤ ਦੇ ਨਾਲ ਰਹੂਗਾ ਉਹਦੇ ਵਾਸਤੇ ਕੋਈ ਨਹੀਂ ਕੋ ਵਦਤਾ ਕਿ ਸਾਡੇ ਵਾਸਤੇ ਕੋਈ ਦੁਤਾ ਨਹੀਂ ਉਹ ਬੰਦੇ ਸਾਡੇ ਵਾਸਤੇ ਹੁੰਦਾ ਸਾਡੇ ਵਾਸਤੇ ਸਾਡਾ ਮਾਨੇ ਹੁੰਦਾ ਆਪੇ ਜੱਗਾ ਆਪੇ ਹੁੰਦਾ ਉਹ ਬੰਦੇ ਜੇ ਕੋਈ ਸਾਡੇ ਵਾਸਤੇ ਬੁੱਤਾ ਸੋਚੂਗਾ ਸਾਡਾ ਕਿਹੜਾ ਉਹ ਸੋਚੇ ਤੇ ਹੋੜ ਲੱਗਿਆ ਬੰਦਾ ਆਪਾਂ ਸੋਚੀਏ ਕਿਉਂ ਆਪੋ ਤਾਂ ਬੰਦਾ ਸੋਚੇ ਰਿਹਾ ਫੇਰ ਜਦ ਲਈ ਜੇ ਪਾਗਲ ਸੋਚੀ ਵੀ ਜਾਂਦਾ ਸੋਚੀ ਜਦ ਫੇਰ ਕੱਪ ਲੱਗਿਆ ਆ ਆਪਣੇ ਕਬਲੇ ਕਬਲੇ ਕਿਹਾ ਹੈ ਜੀ ਜੋ ਉਹ ਕਬਲੇ ਕਹੇ ਜੀ ਜੋ ਲਾਭ ਕੋਈ ਨਹੀਂ ਦਰ ਸਾਧ ਸੰਗੀ ਜਾਣਾ ਪਰਮ ਅਨੰਦ ਦਾ ਸਾਧ ਸੰਗੀ ਜਾਣਾ ਪਰਮ ਅਨੰਦ ਆਹ ਸੰਗੀ ਜਿਹੜਾ ਸਾਧ ਮਤਲਬ ਆਪਣਾ ਸੰਗੀ ਦੇਖੋ ਇੱਥੇ ਸਾਧ ਦੀ ਗੱਲ ਹੈ ਸਾਧ ਦੀ ਸੰਤਤ ਦੀ ਗੱਲ ਸਾਧ ਸੰਗੀ ਜਾਣਾ ਪਰਮ ਅਨੰਦ ਸੰਗੀ ਸਾਥ ਕੇ ਹੀ ਪਰਮ ਅਨੰਦ ਜਾਨੂੰ ਜਾ ਸਕਦਾ ਪੁਰ ਪਹਿਲਾਂ ਦੀ ਸਾਡੀ ਸੰਗਤ ਕਰਨਾਂ ਨੀ ਪਰਮਾਨੰਦ ਗੱਲ ਕਰਨਾਂ ਨੂੰ ਸਾਧਨ ਆਪਣਾ ਮਨ ਸਾਧ ਕੇ ਹੀ ਪਰਮਾਨੰਦ ਦੇਖੋ ਇੱਥੇ ਆ ਕੇ ਬਹਿ ਜਾਓ ਕੋਲ ਮਨ ਸਾਧਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਹੋਵੇ ਕਿ ਕੀ ਹੋਵੇ ਉਹ ਖਾਦੀਆ ਬਹੁਤ ਆ ਧਿਆਨ ਦੀ ਲੋੜ ਹੈ ਕਾਹਨਿਆਂ ਨੂੰ ਵਿਚਾਰ ਧਿਆਨ ਨੂੰ ਵਿਚਾਰਾਂ ਸਭ ਪਤਾ ਲੱਗ ਜਾਂਦਾ ਕੁਛ ਵੀ ਓਖੀ ਸਾਧਕੇ ਸੰਗੀ ਨਹੀਂ ਹੋ ਤਾਂ ਇਹ ਕੇ ਪੜਨ ਵਾਲੇ ਅਰਥ ਕੀ ਨੇ ਕੇ ਪੜਨ ਵਾਲੇ ਆਪੇ ਚੱਪਾ ਨੇ ਕਹੋ ਹਾਂ ਸਾਧਕੇ ਸੰਗੀ ਨਹੀਂ ਹੋ ਜਦੋਂ ਕੋਈ ਸਾਚਾਂ ਦਾ ਫਿਰ ਹੋਂ ਤਾਂ ਪਈ ਨਹੀਂ ਕੋਈ ਜਿਹੜਾ ਤਾਂ ਆਪ ਹੁੰਦਾ ਵੀ ਤਾਂ ਆਪਣੇ ਦਿਲ ਹੋ ਜਾਂਦੇ ਨੇ ਨਾ ਤਿੰਨੇ ਧੰਬ ਦੁਬਾਰਨ ਆ ਰਾ ਹੌਣੈ ਕੁਬੀਤਾ ਆਪਣੀ ਹਾਂਜੀ ਜੇ ਆਪੇ ਜਾਣੇ ਸਾਧਕ ਸਾਧਕੇ ਸੰਗੀ ਤੇ ਸਭ ਆਪ ਹੁੰਦੀ ਸਾਧਕੇ ਸਿੱਖੀ ਤੇ ਆਪਣਾ ਮਨ ਸਾਧ ਜਿਆਦਾ ਉਹ ਆਪਣਾ ਆਪਣੀ ਮਰਜ਼ੀ ਤੇ ਆਲੂਦਾ ਜੇ ਸਭ ਆਪ ਆਪਣੀ ਇੱਛੇ ਆਪਣਾ ਭਾਗ ਗੁਰਗਰ ਪਾਣੀ ਜਿਹੜਾ ਆਪਣਾ ਪਾਣਾ ਹੈ ਆਪੇ ਜਾਣੇ ਸਾਧ ਪੜਾਈ ਆਪੇ ਸਾਧ ਪੜਾਈ ਨਾਮਿਕ ਆਈ ਪ੍ਰਭੂ ਮਨ ਪ੍ਰਭੂ ਗੁਰ ਆਈ ਆਪੇ ਜਾਣੇ ਸਾਧ ਪੜਾਈ ਨਾਮਿਕ ਸਾਧ ਆਈ ਆਪੇ ਜਾਣੇ ਸਾਧ ਪੜਾਈ ਹੈ ਉਹ ਸਾਧ ਆਪੇ ਜਾਣਦਾ ਉਹ ਆ ਹੀ ਨਾ ਨਾਨਕ ਬੜਾ ਬੁਨਿਆਦ ਕਰੇ ਇਸ ਸਾਧ ਬੜਾਈ ਹੈ ਉਥੇ ਹੰਕਾਰ ਤਾਂ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣ ਆ ਜਿਹੜੀ ਬੜਾਈ ਆ ਕੀ ਕੀ ਸਾਦੀ ਕਿ ਆਪਣੀ ਬੜਾਈ ਆਪੇ ਜਾਣਦਾ ਹੋ ਕੋਈ ਨਹੀਂ ਜਾਣ ਸਕਦਾ ਸਾਦੀ ਬੜਾਈ ਹੋ ਰਹੀ ਆ ਹੋ ਰਹੀ ਆ ਨਾੜ ਕੇ ਸਾਧ ਪ੍ਰਭੂ ਕੋਈ ਸਾਧ ਉਹਰ ਪ੍ਰਭੂ ਦੀ ਇੱਕ ਸੋਰਾ ਬਣਾਈ ਹੈ ਹਨ ਬੰਨੀ ਮਾਤੀ ਬਰਦੀ ਹੈ ਕੋਈ ਸਾਧ ਉਹ ਜਾਣਾ ਕੋਈ ਜੋ ਪ੍ਰਭੂ ਆਇਆ ਦਾ ਸਾਧ ਉਹ ਤੇ ਬਖਰਾ ਹੈ ਇਹ ਉਦੋਂ ਘਟਾਏਗਾ ਉਹਨੂੰ ਬਤਾਉ ਇਹ ਜਾਣਾ ਹੋਈ ਜਾਂ ਨੂੰ ਪ੍ਰਭੂ ਚ ਕੀ ਫਰਕ ਹੈ ਕਹਾਂ ਜਾ ਕੇ ਇਹ ਹੋ ਜਾਉਂਦੇ ਇਹ ਨਹੀਂ ਪਤਾ ਮੈਨੂੰ ਜੁਟੋਦਾ ਨਹੀਂ ਬਤਾਵਾ ਉਹ